दोहरा काठमपुर कुर रे बखै एक मुगल की बाल प्राता साथ चित्रित तिन कियो सो सुनो निरपाल चौपाई सौदा निमित्त प्राते गयो खाट कमाए अधिक धन लेयो निष्कह तां भगन को आयो कंठ लाग तिन मोह जितायो अपनी सकल वृथा तिन भाखी जो जो बतई सो सो आखी जो तनहु तो संग खाट कमायो सो भगनी का सकल दिखायो ਮਰੀਮ ਬੇਗਮ ਤਾ ਕੋ ਨਾਮਾ ਭਾਈ ਕੋ ਕਰ ਲਈ ਨਾ ਆਪ ਸ੍ਰਿਤਰ ਸੋਐ ਸੇ ਕੀਨਾ ਦੋਹਰਾ ਭਗਨੀ ਦਰਬ ਬਿਲੋਕੈ ਲੋਭ ਸਿੰਧ ਕੈ ਨਖ ਸਿਖ ਲੋ ਬੂਡਤ ਪਈ ਸੋਦ ਨਾ ਰਹੀ ਜੀਉ ਮਾਹੇ ਚਉਪਈ ਪ੍ਰਾਤ ਬਾਦ ਭਗਨੀ ਨਾ ਵਿਚਾਰਾ ਫਾਂਸੀ ਡਾਰ ਕੰਠ ਲੀਨਾ ਲੂਟ ਸਗਲ ਤੇ ਧਾਨ ਕੋ ਕਰਿਓ ਅਮੋਹ ਆਪਣੇ ਮਨ ਕੋ ਰਾਤ ਭਇ ਰੋਵੈ ਤਬ ਲਾਗੀ ਜਬ ਸਭ ਪ੍ਰਜਾ ਗਾਮ ਕੀ ਜਾਗੀ ਮ੍ਰਿਤਕ ਬੰਧ ਤਬ ਸਭਨ ਦਿਖਾਇਓ ਮਰਿਓ ਆਜੇ ਸਾਪ ਚਬਾਇਓ ਭਲੀ ਪੌਂ ਤਨ ਤਾਹੇ ਗਡਾਇਓ ਜੋ ਤਨ ਆਪ ਜਿਤਾਇਓ ਕੋਰੋ ਔਰ ਜੋ ਕਛ ਜਾ ਕੋ ਧਨ ਥੋਰੋ ਸੋ ਇਹ ਤ੍ਰਿਆ ਪਠਾਵਨ ਕੀ ਜੈ ਫਾਰਖਤੀ ਹਮ ਕੋ ਲਿਖ ਦੀਜੈ ਕਬਜ ਲਿਖਾ ਕਾਜੀ ਤੇ ਲਈ ਕਛ ਤਨ ਮ੍ਰਿਤਕ ਤ੍ਰਿਆ ਕਹਾ ਦਈ ਦੋਹਰਾ ਇਹ ਛਲੇ ਆਪਨੋ ਭਰਾ ਦੇ ਹੱਥ ਲੀਨੀ ਕਬਜ ਲਿਖਾਏ ਨਿਸਾ ਕੀ ਸਾ ਧਨ ਗਈ ਪਚਾਏ ਇਕ ਸ੍ਰੀ ਚరిత్ర ਪਖਿਆਨੇ ਤ੍ਰਿਆ ਚరిత్రੇ ਭੂਪ ਮੰਤਰੀ ਸੰਵਾਦੇ 287 ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਯੂਨਾ ਸ਼ਹਿਰ ਨੂੰ ਮੈਂ ਜਹਾਂ ਦੇ ਛਤਰ ਰਾਜਾ ਇਕ ਤਹ ਸੈਲ ਦੇ ਦੋਸਤਾ ਤਾ ਕੇ ਇੱਕ ਪੜੀ ਵਿਆਕਰਣ ਕੋਕ ਸ਼ਾਸਤਰ ਨੇਕ ਅਜੇਤ ਸੈਣ ਤੇ ਠਾ ਇੱਕ ਛਤਰੀ ਤੇਜਵਾਨ ਬਲਵਾਨ ਤਰਤਰੀ ਰੂਪਵਾਨ ਬਲਵਾਨ ਅਪਾਰਾ ਪੂਰੋ ਪੁਰਖ ਜਗਤੂ ਜਿਆਰਾ ਤੇਜਵਾਨ ਤੋ ਦਿਵਾਨ ਆ ਤੁਲ ਬਲ ਆਏ ਅਨੇਕ ਜੀਤੇ ਜਨ ਤਾਲ ਮਲ ਆਵਤ ਤਾਹੇ ਬਿਲੋਕਿਓ ਰਾਣੀ ਦੁਹੇ ਤਾਸੋ ਜੇ ਪੌਤ ਬਖਾਨੀ ਜੋਹੇ ਧਾਮ ਨਿਰਵਕ ਕੇ ਹੋ ਤੋ ਮੈਂ ਅਸ ਕਾ ਕਰੋ ਉਪਾਉ ਐਸੋ ਬਰ ਤੋਹਿਆਨ ਤਨ ਕਿ ਘੁਾਰ ਕੇ ਧੁਨ ਜਾਵੇ ਅਸ ਕਾਨਨ ਪਰਿ ਦੇਖ ਰਹੀ ਤੈ ਔਰ ਮੈ ਨ ਅਰਮਦ ਭਰੀ ਮੋਹੇ ਰਹੀ ਮਨ ਮਾਇਨਾ ਪ੍ਰਗਟਿ ਤਾਯੋ ਹਉ ਪਲ ਪਲ ਬਲ ਬਰ ਜਾਤੀ ਦਿਵਸ ਗਵਾਯੋ ਚਉਪਈ ਰਹਿਣ ਪੈ ਸਾਚਰੀ ਬੁਲਾਈ ਚਿਤ ਬ੍ਰਿਥਾ ਤਿਹ ਸਕਲ ਸੁਨਾਈ ਜੋ ਤੈ ਦੇ ਮਿਲਾਏ ਮੋਹੇ ਪਿਆਰੀ ਤਉ ਜਾਨੋ ਤੂੰ ਹੀ ਤੂ ਹਮਾਰੀ ਕਹਿਓ ਘੁਾਰ ਸਾਚਰੀ ਸੋ ਜਾਨਾ ਭੇਦ ਨਾ ਦੂਸਰ ਕਾਨ ਬਖਾਨਾ ਤਤਿਨ ਦੌਰ ਤਮਨ ਪਹਿ ਗਈ ਬਹੁ ਵਿਦਤਾ ਹੈ ਪ੍ਰਬੋਧਿਤ ਭਈ ਬਹੁ ਵਿਦਤਾ ਹੈ ਪ੍ਰਬੋਧ ਜਤਾਈ ਜਿਉ ਤਿਉ ਤਾਹ ਤਹਾਂ ਲੈ ਆਈ ਮਾਰਗ ਕੁਾਰਿ ਬਿ ਲੋਕ ਲਖ ਤੇ ਕੁਾਰ ਪਰ ਪਈ ਜਨਕ ਰਾਂਕ ਨਵੋ ਨਿਤ ਪਈ ਵਿਹਾਸ ਵਿਆਸ ਤੇ ਕੰਠ ਲਗਾਇਓ ਮਨ ਮਾਨਤ ਕੋ ਭੋਗ ਕਮਾਇਓ ਥਾ ਦੂਰ ਦ੍ਰਿਦਰ ਦੀ ਆ ਰਹੀ ਧਰ ਸਖੀ ਪਗਨ ਪਰ ਤਉ ਪ੍ਰਸਾਦ ਮੈਂ ਮਿੱਤਰ ਲੈ ਹੋ ਕਹਾ ਕਹੋ ਤੁਹ ਜਾਤ ਨਾ ਕਹਿਓ ਆਪ ਕਥਿ ਆਇ ਸਤਿਤਰ ਬਨਈਐ ਸਦਾ ਮਿੱਤਰ ਕਹਾ ਪਈਐ ਸੋ ਵੈ ਸਦਾ ਸੰਗ ਲੈ ਤਾ ਚੀਨ ਸਕੈ ਕੋ ਨਹਿ ਵਾਕੋ ਤ੍ਰੇ ਚਿਤ੍ਰ ਸੋ ਮੈਂ ਕਹਾ ਤੋ ਸੁਨੋ ਪਿਆਰੇ ਤਾਏ ਛਪਾਏ ਸਦਨ ਮਹਿ ਰਾਖਾ ਰਾਣੀ ਸੋ ਐਸੀ ਵਿਦਭਾਖਾ ਰਾਣੀ ਜੋ ਤੂੰ ਪੁਰਖ ਸਰਾਹਾ ਤਾ ਕੈ ਸ੍ਰੀ ਵਿਸ਼ਨਾਥਨ ਚਾਹਾ ਵਾਕੋ ਕਾਲੀ ਕਾਲ ਹੋਇ ਗਇਓ ਯਾ ਸਖ ਕੇ ਮੁਖ ਤੇ ਸੁਨ ਲੈਓ ਹਮ ਸਭ ਹਨ ਜੋ ਤਾਇਸ ਰਾਹਾ ਤਾਤੇ ਤਿਸ ਬਿਸਨਾਥਨ ਚਾਹਾ ਜਨਿਯਤ ਦ੍ਰਿਸ਼ਤ ਤ੍ਰੀਯਨ ਕੀ ਲਾਗੀ ਤਾਤੇ ਤਾਹੇ ਮ੍ਰਿਤ ਲੈ ਭਾਗੀ ਰਾਣੀ ਸ਼ੋਕ ਤਮਨ ਕੋ ਕੀਓ ਤਾ ਦਿਨ ਅਨਨ ਪਾਣੀ ਪੀਓ ਸਾਥ ਮਰਿਓ ਜਨਿਯੋ ਜੀ ਤਾ ਕੋ ਭੇਦ ਭੇਦ ਨ ਪਾਇਓ ਯਾ ਕੋ ਜਸ ਤੂੰ ਸੁੰਦਰੀ ਆਏ ਨਿਹਾਰਿਓ ਭੈਓ ਨਾ ਹੈ ਹਵੈ ਨਾ ਵਿਚਾਰਿਓ ਯਾ ਕੀ ਬਹਿਨ ਏਕ ਤੇ ਘਰ ਮੈਂ ਛਾੜਿਓ ਜੇ ਪ੍ਰਾਤਮ ਨਗਰ ਮੈਂ ਮੋਹਿ ਤੁਮ ਕਹੋ ਤੋ ਆਣ ਦਿਖਾਉ ਤੋਹੇ ਪਲੀ ਪਲੀ ਸਭ ਬਖਾਨੀ ਭੇਦ ਭੇਦ ਗਤ ਕਿਨੂ ਨਾ ਖਰਚੀ ਅਦਕ ਤਵਨ ਕਹ ਦਈ ਤਾਤ ਕਰ ਕੈ ਬਿਲਾ ਪਠਾਈ ਦੋਹਰਾ विदा भई बो दरब ले गई को हर के धाम आठ मास दूर ता रही लखीना दूसर ਚੋ चौबी नववो मास चढ़त जा पयो ता कह भेष ਨਾਰ ਕੋ कहयो लै रानी कह ताए दिखायो सबन हेर ही ओ हुलसायो जो मैं कहो सुनो निरप नारी ए सबपो तुम अपनी दुलारी राजा साथ ना भेद बखानो मेरो वचन ਜੋ ਇਸ ਕੋ ਰਾਜਾ ਲੈ ਲੈ ਖੈ ਭੂਲ ਤਿਆਰੋ ਤਾਮਨਾਇ ਹੈ ਲੈ ਜਾ ਤੋ ਕਰ ਹੈ ਨਿਜ ਨਾਰੀ ਮੁਖ ਬਾਏ ਰਹਿ ਹੋ ਤੂੰ ਪਿਆਰੀ ਭਲੀ ਕਹੀ ਤੋ ਤਾਏ ਬਖਾਨੀ ਤ੍ਰੇ ਚਿਤ੍ਰ ਗਤ ਕਿਨੂ ਸੁਤਾ ਕੇ ਰਾਖਾ ਭੇਦ ਨਾ ਮੂਲ ਨਿਰਭਤ ਤਨ ਭਾਖਾ ਚਾਹ ਤੋ ਤੀਨ ਰਿਵ ਸੁਤਾ ਸੋ ਭਈ ਏ ਛਲ ਸੋ ਸਾਚਰੀ ਛਲ ਗਈ ਤਾਕਹ ਪ੍ਰਗਟ ਧਾਮ ਬਹਿ ਰਾਖਾ ਨਿਰਪੈ ਭੇਦ ਕੋ ਨਾ ਭਾਖਾ ਦੋਰਾ एहि चरित्तर ते चंचला लयहो अपनो यार सब त्रिमukh बाए रही सकान कहू विचार सुर मुनि नाग भुजंग सब नर बपरे के न देव अदेव त्रियान के भेद पहचानत नाहे इत श्री चरित्तर पख्याने, त्रिया चरितरे भूप मंत्री संबादे 288 चरितर समाप्त मस्त शुभ मस्त अफजू